ਤਾਰਿ ਯਾਰ ਪ੍ਰਭ ਪ੍ਰਭ ਪ੍ਰਭਣੀ ਆਤਮ ਖਾਨੀ ਆ ਅਰਨੀ ਤਾਕੇ ਅੰਤ ਸਬਦ ਕੋ ਠਾਨੀ ਆ ਸਗਲ ਤੁਪਕੇ ਨਾਮ ਜਾਣ ਦੀ ਲੀਤੀ ਆ ਹੋ ਜਹ ਤਹੀ ਤੇ ਦੀਦੀ ਆ ਸੌ ਢਿਸ ਇਸ ਖਾਨ ਕੈ ਅਰਨੀ ਤਾਕੇ ਅੰਤ ਸਬਦ ਕੋ ਠਾਨ ਕੈ ਤੁਪਕੇ ਨਾਮ ਜਾਣ ਜੀ ਲੀਤੀ ਆ ਹੋ ਜਾ ਕੇ ਭੀਤਰ ਭੇਦ ਨਾਇਕ ਨਹੀਂ ਕੀਦੀ ਆ ਇਸ ਪਾਤ ਕਹਿ ਪ੍ਰਭਣੀ अरणी ताके अंत शब्द को राखिया सगल तुपके नाम जान जी लीजिय कवि दोहे रनमा दे निडर होए दीजिय अंक पे इंद्र इंद्रणी इंद्रणी भाखिया अरणी इसनी अंत शब्द को राखिया सगल तुपके नाम जान जी लीजिय ओसो काव्य सभा के बीच उच्चारण कीजिय नाग नाहे नाहे इसन एसनी भाखिया मतनी ताके अंत शब्द को राखिया ਸਗਲ ਤੁਪਕ ਕੇ ਨਾਮ ਚਤਰ ਜੀ ਜਾਨੀਐ ਹੋ ਪੁਸਤਕ ਪੋਥਿ ਨਿਮਾਜਿ ਨ ਸੰਕ ਬਖਾਨੀਐ ਹਾਰਿ ਪਾ ਤੇ ਪਾ ਤੇ ਪਾ ਤੇ ਪਤਨੀ ਆਪਨੀ ਦੀਐ ਤਾ ਕੇ ਅੰਤ ਸਬਦ ਕੋ ਦੀਜੀਐ ਸਗਲ ਤੁਪਕ ਕੇ ਨਾਮ ਚਤਰ ਜੀ ਜਾਨੀਐ ਹੁਕਮਿਤ ਕਾਵ ਕੇ ਮਾਜਿ ਨ ਸੰਕ ਬਖਾਨੀਐ ਚਉਪਈ ਗਾਜ ਪਦਨ ਨਿਪਣੀ ਨਿਰਪਨ ਪਣੀਜੈ ਨਿਰਪਣੀ ਅਰਣੀ ਪਉਣ ਪਦ ਦੇਜੈ ਸਭ ਸ੍ਰੀ ਨਾਮ ਤੁਭ ਕੋ ਨਹੀਂਐ ਦੋਹਾ ਮਾ ਚਉਪਈ ਕਹੀਐ ਅੜਿਲ ਸਾਬ ਜੇ ਨਿਰਪ ਨਿਰਪ ਨਿਰਪਤ ਨਿਰਪੁ ਨਹੀਂ ਪਾਖਿਆ ਅਰਣੀ ਤਾਕੇ ਅੰਤ ਸਬਦ ਕੋ ਰਾਖਿਆ ਅਮਿਤ ਤੁਮਕੇ ਨਾਮ ਜਾਣ ਜੀ ਲੀਜੀਐ ਹੁਕਮਿਤ ਕਾਵਕੇ ਮਾਝੇ ਉਚਾਰਿਓ ਕੀਜੀਐ ਚਉਪਈ ਆਸ ਸਭ ਮਾਤੰਗ ਪਣੀਜੈ ਚਾਰ ਬਾਰ ਨਿਰਪ ਪਦ ਕੋ ਦੀਜੈ ਅਰਣੀ ਤਾਕੇ ਅੰਤਵ ਖਾਨੋ ਸਭ ਸ੍ਰੀ ਨਾਮ ਤੁਮਕੇ ਜਾਣੋ ਆਰਗੇ ਅੰਦਨ ਸਬਦ ਉਚਾਰਿਐ ਚਾਰ ਬਾਰ ਨਿਪ ਸਬਦ ਹੈ ਧਰਿਐ अरमी शब्द बहोत तेज जिहै नाम तुके सब लह लिजै बाह शब्द को प्रथम पुनिजै चार बार निरप शब्द तरीजै सकल तुके नाम पहचानो या मैं भेद रतीक न जानो बाह शब्द को आद उचरियै चार बार निरप शब्द है धरिजै सब श्री नाम तुमके लइयै चहियै जे ठांते ठां कहियै तुरंग शब्द को आद विचारो चार बार निरपद कहो दारो सकल तुके नाम लीजै रुता जहां तीठ वरपणी हिज है पदमुखते आत्मखानो चार बार निब शब्द है नाम तुके सकल लहजे कवित काव के माज बणीज है थरी शब्द को आग बणीज है चार बार निब शब्द के हिज है आरी पद ताके अंतिम खानो नाम तुके सकल पहचानो देव शब्द को आग बखानो निब पद तीन बार पुन ठानो सत्र शब्द को बहुर बणीज है ਨਾਮ ਤੁਮਕ ਕੇ ਸਗਲ ਲਹਿਜੈ ਅਮਰ ਸ਼ਬਦ ਕੋ ਆਦ ਉਚਾਰਹੁ ਨਿਰਪਪਦ ਤੀਨ ਬਾਰ ਤੁੰਡਾਰਹੁ ਔਰ ਕਹਿ ਨਾਮ ਤੁਮਕ ਕੇ ਲੀਜੈ ਕਵਿਤ ਕਾ ਕੇ ਭੀਤਰ ਦੀਜੈ ਨਿਰਜਰ ਸ਼ਬਦ ਕੋ ਆਦ ਉਚਰੀਐ ਨਿਰਪਪਦ ਤੀਨ ਬਾਰ ਤੁੰ ਧਰੀਐ ਔਰ ਕਹਿ ਨਾਮ ਤੁਮਕ ਕੇ ਜਾਣਹੁ ਸੰਕਛਾੜ ਨਿਰਸੰਕ ਬਖਾਨਹੁ विपद शब्द को आत्मनीज जाय तीन बार निरशब्द त्रिजाय रिप कह नाम तु के लइया संका त्याग सभा में कहिया सुरपद आज शब्द को त्रिजाय तीन बार निरप पद कह डरि जाय आरि पद ताके अंत बखानो सब श्री नाम तुम के जानो सुमिर शब्द को आत्म बखानो तीन बार नायक पद ठानो आरि पद ताके अंत पुनीज जाय नाम तुम के सकल लीज जाय आदि शब्द त्रिदवेय बखानो तीन बार निपद प्रमाणो आरि पद ताके अंत पुनिजे सब श्री नाम तुमक ले लीजे ब्रिनद राधिक शब्द आद उचारो तीन बार नायक पद धारो आरि पद अंत थवन के दी जो नाम तुमके सब ले लीजो गत विमान शब्द आद बखानो तीन बार पद पता प्रमाणो आरि पद अंत थवन के कहिया सब श्री नाम तुमके लेहिया अढिल अमृतेश शब्द आद उच्चारण की जिए तीन बार पद शब्द तमन के दी जिए सत्र शब्द पुन ता के अंत बखानी है ओ सकल तुपक के नाम छत्र जी जानी है मद पद मुख ते प्रथमे नीके पाखिए तीन बार पद शब्द तमन के राखी है अर कह नाम तुके चतुपछानी है ओ जह जाचिए शब्द निसंख बखानी है सुधा शब्द को आद उच्चारण की जिए निरप पद ता के अंत बार रिप पद भाग तुफंग नाम जी जानिय हो सो कव चौपई मा जन संक बखानी है शब्द पियोग सो मुक्ते प्रथम उचारिय तीन बार निब ਸੋ अंत ते डारिय रिप पद भाग तुप के नाम नहिती है हो सो कव दोहरा माहिं डर होए दीदी है असुधा शब्द सो मुक्त आद उचार कय तीन बार निब शब्द तमन के डार क रिप ਪ੍ਰਥਮ ਪ੍ਰਾਨ ਦਾ ਪਦ ਕੋ ਸੋ ਕਭ ਬਖਾਨਿਐ ਚਾਰ ਬਾਰ ਨਿਪਸ਼ਬ ਤਮਨ ਕੇ ਠਾਨਿਐ ਔਰ ਕਹਿ ਨਾਮ ਤੁਮ ਕੇ ਹਿਰਦੈ ਪਛਾਨਿਐ ਉਹ ਸੁਦਨ ਸਵਈਆ ਭੀਤਰ ਨਿਡਰ ਬਖਾਨਿਐ ਜੀਵ ਦਤ ਪਦ ਪ੍ਰਥਮ ਉਚਾਰਨ ਕੀ ਦੀਐ ਚਾਰ ਬਾਰ ਨਿਪਸ਼ਬਦੈ ਅੰਤ ਪੁਨੀ ਦੀਐ ਔਰ ਕਹਿ ਨਾਮ ਤੁਮ ਕੇ ਹਿਰਦੈ ਪਛਾਨ ਲੈ ਹੋ ਕਹੀ ਹਮਾਰੀ ਆਜ ਹਿਰਦੈ ਪਹਿਚਾਨ ਲੈ ਚਉਪਈ ਵਾਪਦਾ ਪਦ ਕੋ ਪ੍ਰਥਮ ਉਚਾਰ ਚਾਰ ਬਾਰ ਨਾਇਕ ਪਦ ਡਾ ਰੋ ਸਤਰ ਸ਼ਬਦ ਕੋ ਬਹਰ ਪਣੀਜੈ ਨਾਮ ਤੁਮਕੇ ਸਭ ਲੈ ਲਿਜੈ ਬਹਰ ਦੇਹ ਕਾ ਸ਼ਬਦ ਬਖਾਨੋ ਚਾਰ ਬਾਰ ਪਾਤੀ ਸ਼ਬਦ ਪਰਮਾਨੋ ਅਰ ਕਹਿ ਨਾਮ ਤੁਮਕੇ ਨਹੀਂ ਐ ਝੂਲਾ ਛੰਦ ਵਿੱਚ ਹੱਸ ਕਈ ਹੈ ਪ੍ਰਾਨਦਤ ਪਦ ਪ੍ਰਥਮ ਪਣੀਜੈ ਚਾਰ ਬਾਰ ਨਿਵ ਸ਼ਬ ਤਰੀਜੈ ਅਰ ਪਦ 타 ਕੇ ਅੰਤ ਬਖਾਨੋ ਸਭ ਸ੍ਰੀ ਨਾਮ ਤੁਮਕੇ ਜਾਨੋ अडेल जरा शब्द को मुख सवात् बखानी है रिप कह निरप पद बार चार पुण ठानी है 70 शब्द को ताके अंत बखान का हो सकल तुप के नाम ली दी है जान का प्रथम विरद्धता शब्द उच्चारण कीजी है 70 शब्द को ताके अंत पनी दी है पौन 70 पद तेह परांत बखानी ਆਰ ਪਦ ਮੁਖਤੇ ਬੌਰ ਬਖਾਨੈ ਨਾਮ ਤਬਕੇ ਹੋਏ ਪ੍ਰਮਾਨੈ ੜਿਲ ਹਾਲਸ ਸਬਦ ਸੋ ਸੋ ਅਰ ਕਹਿ ਠਾਨੀਐ ਸਗਲ ਛੰਦ ਪਾਦੜੀ ਮਾਝ ਨਿ ਦੰਤ ਪਦ ਮੁਖਤੇ ਆਤਮ ਬਖਾਨੀਐ ਅਰ ਕਹਿ ਨਿਪ ਬਾਰ ਚਾਰ ਪੁਨ ਠਾਨੀਐ ਅਰ ਕਹਿ ਨਾਮ ਤੁਮਕੇ ਹਿਰਦੈ ਬਖਾਨੀਐ ਹੋ ਛੰਦ ਰੁਆਲਾ ਬਖੈ ਨਿ ਡਰ ਹੋਏ ਠਾਨੀਐ ਜੋ ਬਨਾਤ ਅੰਤਿਕ ਪਦ ਪ੍ਰਥਮ ਵਿਚਾਰਿਆ ਚਾਰ ਬਾਰ ਜਬ ਸਬ ਤਮਨ ਪਰ ਡਾਰੀਐ ਹਰਿ ਕਹਿ ਰਾਮ ਤੁਮ ਕੇ ਚਤਰ ਪਛਾਨੀਐ ਉਹ ਛੰਦ ਚਾਉ ਪਈ ਮਾਇ ਨ ਸੰਗ ਬਖਾਨੀਐ ਤਰਨ ਦੰਤੈ ਹਰ ਸਬ ਸੁ ਮੁਖਤੇ ਭਾਖੀਐ ਚਤਰ ਬਾਰ ਨਿਵ ਸਬ ਤਮਨ ਕੇ ਰਾਖੀਐ ਸਗਲ ਤੁਮ ਕੇ ਨਾਮ ਜਾਣ ਜੀ ਲੀ ਦੀਐ ਉਹ ਸੁਧਨ ਦੋਹਰਾ ਮਾਇ ਨ ਡਰ ਹੋਏ ਦੀ ਦੀਐ ਜੋ ਬਨਾਰਿਆri ਪਦ ਕੋ ਆਦ ਪਖਾਨੀਐ ਚਾਰ ਬਾਰ ਨਿਵ ਸਬ ਤਮਨ ਕੇ ਠਾਨੀਐ सत्र शब्द को अंत तमन के भाखिया हो सकल तुपके नाम छत्र चित राखीया चतुर्थ अवस्था आरपदि आध बखानीया चतुर्वार निरप शब्द तमन के ठानीया सत्र शब्द को अंत सो बौर बखान का हो सकल तुपके नाम ली दिया जानका जम फांसी के नाम ने आध उचारिया हर का निरप पद बार चार पुंडारीया सो कवि तुपके नाम पाखर ली दिया ओ सुदन सुवैया मां निदार हो ਅਰ ਬਲਾਰ ਅਰ ਆਦ ਉਚਾਰਨ ਕੀਤੀਐ ਚਾਰ ਬਾਰ ਪਦ ਸ਼ਬਦ ਤਮਨ ਕੇ ਦੀਜੀਐ ਸਗਲ ਤੁਪਕ ਕੇ ਨਾਮ ਜਾਣ ਦੀ ਲੀਜੀਐ ਉਹ ਛੰਦ ਕੁੰਡਰੀਆ ਮਾਇ ਸ਼ੰਕ ਤਜ ਦੀਜੀਐ ਔਰ ਜਾ ਰੇ ਅਰ ਆਦ ਉਚਾਰਨ ਕੀਤੀਐ ਚਾਰ ਬਾਰ ਨਿਪਦ ਕੋ ਬੌਰ ਪਣੀ ਦੀਐ ਅਰ ਕਹਿ ਨਾਮ ਤੁਪਕੇ ਚਤੁਰਪੁਛਾਨੀਐ ਉਹ ਛੰਦ ਝੂਲ ਮਾਇ ਨ ਸੰਕ ਬਖਾਨੀਐ ਦੇਹ ਵਾਸੀ ਅਰ ਹਰ ਪਦ ਆਤ ਪੁਨੀ ਦੀਐ ਚਾਰ ਬਾਰ ਨਿਪ ਸ਼ਬਦ ਸੋ ਬੌਰ ਕਹੀ ਦੀਐ ਅਰ ਕਹਿ ਨਾਮ ਤੁਮਕੇ ਚਤੁਰ ਵਿਚਾਰੀਐ ਉਹ ਛੰਦ ਢਿਲਕੇ ਮਾਹੈ ਨ ਡਰ ਕਹਿ ਡਾਰੀਐ ਪਾਪਵਾਸੀ ਅਰੇ ਆਰਿ ਸ਼ਬਦ ਆਤਮ ਖਾਨੀਐ ਚਾਰ ਤਮਨ ਕੇ ਠਾਨੀਐ ਅਰ ਕਹਿ ਨਾਮ ਤੁਮਕੇ ਚਤੁਰ ਪਛਾਨੀਐ ਉਹ ਛੰਦ ਚੰਚਰੀਆ ਮਾਹੈ ਸੰਖ ਪਰਮਾਨੀਐ ਤਨਵਾਸੀ ਅਰੇ ਹਰ ਕੋ ਆਤਮ ਖਾਨ ਕੈ ਚਾਰ ਬਾਰ ਨਿਪਸ਼ਬਦ ਤਮਨ ਕੇ ਠਾਨ ਕੈ ਕਹਿ ਨਾਮ ਤੁਮਕੇ ਚਤੁਰ ਪਛਾਨੀਐ ਉਹ ਕਰੋ ਉਚਾਰਨ ਤਹਾਂ ਜਹ ਜੀ ਜਾਣੀਐ असुर शब्द को आद उच्चारण की जए पित कह निरप पद अंतमन के दीजिय अर कह नाम तुके चतर पहचानिय हो निडार बखानो तहां जहां जी जानिय राजसार पद मुखते आत्म खान यहो चार बार पद शब्द तमन के ठानीओ अर कह नाम तुके चित्त मै जान ले ओ जो पूछै तो आय निशंक बताए दए दानवार पद मुखते सुघर प्रथम उचर ਅਰਿਕਾਹ ਨਾਮ ਤੁਪਕੇ ਚਤੁਰਪਛਾਨ ਲੈ ਹੋ ਸੋ ਕਵ ਸਬਾ ਕੇ ਮਾਂ ਦੇ ਨ ਹੋਏ ਭਾਗਦਾ ਐ ਆ ਸੋ ਕਵ ਉਚਾਰ ਕੈ ਤੀਂ ਬਾਰ ਨਿਬ ਸ਼ਬਦ ਅੰਤ ਤੇ ਡਾਰਕਾ ਐ ਅਰਿਕਾਹ ਨਾਮ ਤੁਪਕੇ ਸਗਲ ਸੁਧਾਰ ਲੈ ਹੋ ਪੜਿਓ ਚਾਹ ਤਿਹ ਨਾਰਕੋ ਤੁਰਤ ਸਿਖਾਏ ਦਾ ਸੱਕਰ ਸ਼ਬਦ ਕੋ ਆਦ ਉਚਾਰਨ ਕੀ ਆਰੀ ਅਰ ਯਰਿਕਾਹ ਪਦ ਚਾਰ ਬਾਰ ਪਦ ਦੀਜੀਐ 70 ਸ਼ਬਦ ਕਹੋ ਤਾਂ ਕੇ ਅੰਤਬਖਾਨੀਆਂ ਉਹ ਸਗਲ ਤੁਪਕ ਕੇ ਨਾਮ ਚਤਰਜੀ ਜਾਣੀਐ ਸਤਕਰ ਤੇ ਆਰੀ ਆਦ ਉਚਾਰਨ ਕੀਜੀਐ ਚਾਰ ਬਾਰ ਨਿਬ ਸ਼ਬਦ ਤਮਨ ਕੇ ਦੀਜੀਐ 70 ਸ਼ਬਦ ਕੋ ਤਾਕੇ ਅੰਤਬਖਾਨ ਕੈ ਉਹ ਸਗਲ ਤੁਪਕ ਕੇ ਨਾਮ ਲੀ ਦੀਓ ਜਾਣ ਕੈ ਸਚੀ ਪਤੇਰੇ ਆਰੀ ਆਦ ਸ਼ਬਦ ਕਹੋ ਭਾਂਖੀਐ ਚਾਰ ਬਾਰ ਨਿਬ ਸ਼ਬਦ ਤਮਨ ਕੇ ਰਾਖੀਐ ਹਰ ਕਹ ਨਾਮ ਤੁਮਕੇ ਚਤਰਪਛਾਨੀਐ ਉਹ ਛੰਦ ਝੂਲਨਾ ਮਾਏ ਸੰਗ ਬਖਾਨੀਐ ਸ਼ਕਰ ਰਦਨ ਅਰਿ ਰਿਪ ਪਦੇ ਆਦ ਬਖਾਨ ਕਹ ਤੀਰ 바ਰ ਨਿਪ ਪਦ ਕਹੋ ਬਹੁਰ ਪ੍ਰਮਾਨ ਕਹ ਸਤਰ ਸ਼ਬਦ ਕਹ ਨਾਮ ਤੁਮਕੇ ਜਾਣੀਐ ਉਹ ਝੂਲਾ ਛੰਦਨ ਮਾਜ ਸੰਗ ਬਖਾਨੀਐ ਆਦ ਸ਼ਬਦ ਪਰਹੁ ਉਤਰ ਉਚਾਰਨ ਕੀਜੀਐ ਹਰ ਕਹ ਪਿਤਨੀ ਸਿਆਰਿ ਪਦ ਬਹੁਰ ਪਨੀਦੀਐ ਸਗਲ ਤੁਪਕ ਕੇ ਨਾਮ ਚਤਰ ਲੈ ਨੀ ਜੀਐ ਉਹ ਸੁਗਰ ਸੋਰ ਠਾ ਮਾਂ ਜੇ ਨਿਡਰ ਹੋਏ ਦੀ ਜੀਐ ਬਾਸ ਵਾਰੀ ਅਰ ਯਾਦ ਉਚਾਰਨ ਕੀ ਜੀਐ ਕਿਤਨੀ ਇਸਨੀ ਅਰਨੀ ਅੰਤ ਪਣੀ ਜੀਐ ਸਗਲ ਤੁਪਕ ਕੇ ਨਾਮ ਚਤਰ ਜੀ ਛੰਦ ਦੋਹਰਾ ਮਾਂ ਸੰਖ ਬਖਾਨੀਐ ਆਦ ਬ੍ਰਿਤ ਹਾ ਯਾਰੇ ਅਰ ਪਦ ਹੈ ਤੀਨ ਵਾਰ ਇਸ ਸ਼ਬਦ ਤਵਨ ਕੇ ਥਾਨ ਕੈ ਰੇਪੁ ਪੁਰ ਠਾਨ ਤੁਮ ਕੇ ਨਾਮ ਪਛਾਨ ਲੈ ਹੋ ਪੜਿਓ ਚਾਹਤ ਜੋ ਨਰ ਤੇ ਭੇਦ ਬਤਾਇਦਾ ਮਗਵਾਂਤ ਕੇ ਅਰਿਆਦ ਸਬਦ ਕੋ ਭਾਖੀ ਆਇ ਤੀਨ 바ਰ ਨਿ ਤਮਨ ਕੇ ਰਾਖੀ ਆ ਰੇਪ ਕਹਿ ਨਾਮ ਤੁਮ ਕੇ ਸੁਗਰ ਲਹੀ ਜਿਐ ਕਥਾ ਕੀਰਤਨ ਮਾਇਨ ਸੰਕ ਪਣੀ ਜਿਐ maat lesreya shabd hai aadma khan kahe teen bar ne shabd taman ke than ka 70 shabd pun taake anto chaariya ho sagal puk ke naam sumat jis naatak ਤਕ shabd aar uchariye teen baar pad raj taman ke dariyye hari pun tamana ant shabd ਕੇ dijiye ho sagal tub ke naam sughar leh li jiye purandrar hari yaad shabd kaho paak ka teen baar nir pad ant te hiraak ka bahur satar pad ant taman ke dijiye ho sughar tub ke naam sada lakh li jiye chaupai बज्जर धर रे अरि आध बखानो तीन बार ईसर पद ठाणो अर पुने अंत भोर ते दीजाय साभ श्री नाम तुभक ले लीजाय अड़िल तुरा खाड़ अरि आरि पादे आद उचारियै तीन बार निरप पद है अंत तह धारियै सतर बहु अर पुने अंत तमन के ठाणकाय ओ सकल तुभक के नाम लीजियो ओ जानकाय रिप पाकर रिप शब्द अंत तह भाखियै नाजक पात्र है बार तमन के राखियै ਰੇਪੁ ਪੁਨ ਤਾਕੇ ਅੰਤ ਸੁਗਰ ਕਹਿ ਦੀ ਜਿਐ ਹੋ ਨਾਮ ਤੁਮਕ ਬੋਚੀਨ ਉਚਾਰਿਓ ਕੀ ਜਿਐ ਇੰਦਰਾਤਕ ਅਰਿਆਦ ਸਬਦ ਕੋ ਭਾਖਿਐ ਨਾਇਕ ਪਾਤੜੇ ਤਵਨ ਕੇ ਰਾਖੀਆ ਸੱਤਰ ਸਬਦ ਪੁਨ ਤਾਕੇ ਅੰਤ ਧੀ ਜਿਐ ਉਹ ਸਗਲ ਤੁਪਕੇ ਨਾਲ ਜਾਨਮਨ ਦੀ ਜਿਐ ਦੇਵ ਸਬਦ ਕੋ ਮੁਖ ਤੇ ਆਦ ਬਖਾਨੀਐ ਅਰਦਨ ਕਹੈ ਅਰਦਨ ਪਦ ਅੰਤ ਪਰਮਾਨੀਐ तीन बार पद शब्द तमन के पाखि आए हो अर कह नाम तुब के मन बह राखी आए अमरा हरदन शब्द सो मुखते पाखि आए नायक पात्र है भारतमन के राखी आए रिप कह नाम तुब के सुगुर पहचानिए हो भेदा भेद कविता के माहे बखानी आए निर्जरार हरदन पद प्रथमोचार कह तीन बार निब शब्द तमन के दार कह अर कह नाम तुब के, के सुगुर लही दी आए हो अड़िन छंद विभु धमन ਸਬਦਾਦ अंतक शब्द आ उच्चारण कर तीन बार निम शब्द तमन के धार कर हे रूप कह नाम तुके सुगुरु विचारिय ओ छंद रोहला मां जे निसंकोचारिय सुपर बाण पर आर पद प्रथम पनीजी है तीन बार पद शब्द तमन पर दीजी है आर पद भाख तुके ना पहचानिय ओ ਪ੍ਰਥਮ ਸ਼ਬਦ ਤ੍ਰਿਦਵੇਸ ਉਚਾਰਨ ਕੀਜੀਐ ਹਰਿ ਹਰਿ ਕਹਿ ਨਿਰਪਪਦ ਤ੍ਰੈ ਵਾਰ ਪੁਣੀਦੀਐ ਸੱਤਰ ਸ਼ਬਦ ਤਾਕੇ ਪੁਨੇ ਅੰਤ ਉਚਾਰਿਐ ਹੋ ਸਗਲ ਤੁਪਕ ਕੇ ਨਾਮ ਸੁਬੁੱਧ ਵਿਚਾਰਿਐ ਬ੍ਰਿੰਦਾਰਕ ਹਰੀ ਹਰੀ ਸ਼ਬਦਾਂ ਦਾ ਵਿਚਾਰਜੈ ਤੀਨ ਵਾਰ ਪਦ ਸ਼ਬਦ ਤਮਨ ਕੇ ਡਾਰਜੈ ਸੱਤਰ ਸ਼ਬਦ ਤਾਕੇ ਪੁਨੇ ਅੰਤ ਪੁਣੀਦੀਐ ਹੋ ਸਗਲ ਤੁਪਕ ਕੇ ਨਾਮ ਸੁਮਤ ਲੈ ਲੀਜੀਐ ਸਭ ਵਿਵਾਨ ਕੇ ਨਾਮ ਭਾਗ ਗਦ ਭਾਖੀਐ ਹਾਰਿ ਹਰਿ ਕਹ ਨਿਰਵਚਾਰ ਬਾਰ ਪਦ ਰਾਖੀਐ ਬਹੁ ਸੱਤਰ ਪੁਨੇ ਅੰਤ ਤਮਨ ਕੇ ਦੀਦਿਆ ਉਹ ਸਗਲ ਤੁਮ ਕੇ ਨਾਮ ਸੁਮਤ ਲੈ ਲੀ ਦੀਐ ਅਗਰ ਜਿਵ ਪਦ ਕੋ ਸੁ ਪੁਨ ਬਖਾਨੀਐ ਹਾਰਿ ਹਰਿ ਕਹ ਨਿਰਵਚਾਰ ਬਾਰ ਪੁਨ ਠਾਨੀਐ ਰਿਪ ਪਦ ਭਾਖ ਤੁਮ ਕੇ ਨਾਮ ਪਛਾਨੀਐ ਉਹ ਕਵਿਤ ਕਾਭ ਕੇ ਮਾਂ ਜੇ નિਸ਼ੰਕ ਪਰਮਾਨੀਐ ਇਤਿ ਸ਼੍ਰੀ ਸ਼ਾਸਤਰ ਨਾਮ ਵਾਲਾ ਪੁਰਾਣੇ ਤੁਕ ਨਾਮ ਪਾਂਚਵੋ ਅਧਿਆਇ ਸਮਾਪਤ ਮਸਤ ਸੁਭ ਮਸਤ